ਅੱਲਾਹ ਹੈ ਲਹੁ ਤਾਂ ਕਿਆ ਕਹੂੰ ਕਹੂੰ ਤਾਂ ਕੋ ਉਪਕਾਰ ਹੁਣ ਗੱਲ ਹੋ ਅੱਲਾਹ ਦੇ ਕਰਦੇ ਨੇ ਭਗਵਾਨ ਦੀ ਜਾਣ ਕੇ ਨਹੀਂ ਕਰਦੇ ਕਿਉਂਕਿ ਮੁਸਲਮਾਨ ਨੇ ਕਰਜੋਆ ਹੀ ਬੰਦ ਚਲਤੋ ਅੱਲਾਹ ਕਹੇ ਜੇ ਮੈਂ ਅੱਲਾਹ ਨੂੰ ਪ੍ਰਾਪਤ ਕਰਨ ਨੂੰ ਅੱਲਾਹ ਦੇ ਜੁੜ ਜਬ ਕਹਿੰਦੇ ਦੱਸੂ ਕੀ ਅੱਲਾ ਦਾ ਅੱਲਾ ਵਰਗਾ ਦਾ ਹੋਰ ਕੁਝ ਹੈ ਨਹੀਂ ਮੈਂ ਕੀ ਦੱਸੂ ਕੀ ਜ਼ਬੂਤ ਹੈ ਮੇਰੇ ਕੋਲ ਅੱਲਾ ਨਾਲ ਜੁੜ ਗਿਆ ਕਿਵੇਂ ਨੂਰ ਨੂੰ ਕਹੂ ਜੁੜਿਆ ਮੇਰਾ ਅੱਲਾ ਲਹੁ ਤਾਂ ਕਿਆ ਹੂੰ ਅੱਲਾ ਹੀ ਤੂੰ ਕਹਿ ਰਿਹਾ ਅੱਲਾ ਦਾ ਤੇ ਭਾਵ ਕੀ ਹੈ ਅੱਲਾ ਸ਼ਬਦ ਗੁਰੂ ਦਾ ਹੀ ਰੋਹ ਹੈ ਸ਼ਬਦ ਗੁਰੂ ਹੈ ਰੋਹ ਦਾ ਰੋਹ بل اللہ upayakin ne hukm de upayakin ne to hukm ne pa upayas par is kare ke hukm apne kol nahi kita alloha arth hi dassya uthe kabeer ne alloha arth hai dassya allah ki tu kehnde ne oh arth dassde ne lafzan ne asi pata nahi samajhde ਗਰਬਜ਼ਾਂ ਦੇ ਅਰਥ ਦੱਸਦੀ ਹੈ ਮਾਣੀ ਇਹ ਜੀ ਅੱਲਾਹ ਕਰਕੇ ਅਸੀਂ ਤਾਂ ਕੁਝ ਹੋ ਰਿਹਾ ਸਮਝੀ ਜਾਂਦੇ ਹਾਂ ਪਤਾ ਨਹੀਂ ਕੀ ਗਾਇਤੋ ਅੱਲੋ ਦਾ ਬਦਲੋ ਕੀ ਇਹ ਦੱਸਿਆ ਹੈ ਅੱਬਲ ਅੱਲੋ ਨੂਰ ਉਪਰ ਨੂਰ ਕਿੰਨਾ ਪੈਦਾ ਹੋਇਆ ਹੁਕਮ ਨਾਲ ਪੈਦਾ ਹੋਇਆ ਸਾਰੀ ਸਿਰਫ ਹੁਕਮ ਨਾਲ ਹੀ ਹੈ ਜੰਮੜ ਮਰਨਾ ਹੁਕਮ ਹੈ ਜਸਰ ਲੋ ਦਾ ਬੰਨ ਹੁਕਮ ਹੈ ਕੋਈ ਬੰਦਾ ਨਹੀਂ ਹੈ ਅੱਲਾਹ ਲਾਹੂ ਤਾਂ ਕਿਆ ਕਹੂੰ ਕੌਣ ਹੈ ਹੁਕਮ ਨਾਲ ਜੁੜ ਜਮ ਹੁਕਮ ਬੁੱਝਣ ਬ ਹੁਕਮ ਬੁੱਝ ਪਰਪਰ ਪਾਇ ਜੇ ਮੇਰੀ ਸੁਰਤ ਸ਼ਬਦ ਨਾਲ ਜੁੜ ਜਵੇ ਤੁਰਕੀ ਬਾਣੀ ਨਾਲ ਮੈਂ ਦਸੂਗਾ ਕਿਸੇ ਨੂੰ ਕਹੂੰ ਤਕੋ ਕੋਈ ਉਪਕਾਰ ਜੋ ਕਰ ਰਿਹਾ ਹੁਕਮ ਨਾਲ ਜੋ ਹੋ ਰਿਹਾ ਉਹੀ ਬਿਆਨ ਕਰੂਗਾ ਕੁਦਰਤ ਜੋ ਵਰਤ ਰਹੀ ਹੈ ਪਾਣਾ ਸਾਰਾ ਉਹਦਾ ਵਰਤ ਰਿਹਾ ਉਹੀ ਦਸੂ ਵੀ ਆ ਜਿਹੜਾ ਵਰਤ ਰਿਹਾ ਇਹਦੇ ਪਿੱਛੇ ਅੱਲੋ ਕੰਮ ਕਰਦਾ ਅੱਲੋ ਦੀ ਸ਼ਕਤੀ ਕੰਮ ਕਰਦੀ ਹੈ ਇਹਦੇ ਪਿੱਛੇ ਉਹਦੀਆਂ ਸ਼ਕਤੀਆਂ ਹੀ ਦੱਸੂਗਾ ਮੈਂ ਹੋਰ ਕੁਝ ਨਹੀਂ ਦੱਸ ਸਕਦਾ ਸ਼ਕਤੀਆਂ ਤੁਹਾਡੇ ਸਾਹਮਣੇ ਨੇ ਉਹਦੀ ਵਿੱਚ ਕੁਦਰਤ ਹਰ ਪ੍ਰਭ ਬਸੈ ਜੀਉ ਕੁਦਰਤ ਤੋਂ ਕਾਦਰ ਦਾ ਦਰਸ਼ਨ ਕਰਾਉਂਗਾ ਮੈਂ ਹੋਰ ਕੁਝ ਨਹੀਂ ਕਰ ਸਕਦਾ ਕੁਦਰਤ ਉਹਦੇ ਸਾਹਮਣੇ ਤੁਹਾਡੇ ਕਾਦਰ ਵਿੱਚ ਉਹਦੇ ਲੁਕਿਆ ਹੋਇਆ ਸਭ ਕੁਝ ਵਰਤੇ ਤੇਰਾ ਪੜ ਕਛੂ ਕੁ ਮੈਂ ਗੱਲ ਕੀਤੀ ਜਦ ਬੱਚੇ ਬਾਹਰ ਦੇ ਪਾਣੀ ਤੋਂ ਉਹਨਾਂ ਦੇ ਖੰਭ ਨਹੀਂ ਉੱਡ ਕੇ ਆ ਜਾਣ ਉਹ ਪਾਲਣ ਵਾਲੂ ਕਿਉਂ ਹੁੰਦੇ ਦੂਜੇ ਪਾਸੇ ਨੂੰ ਕਿਉਂ ਨਹੀਂ ਚਲੇ ਜਾਂਦੇ ਬੀਜ ਮੰਤਰ ਸਭ ਕੋ ਗਿਆ ਰੂਹ ਦਾ ਬੱਚੇ ਨੇ ਛੜਿਆ ਹੁੰਦੀ ਹੈ ਕੂਝ ਕੌਣ ਪਾਦਾ ਹੈ ਬੱਚਾ ਤੂੰ ਕਿਉਂ ਚਿੰਤਾ ਕਰਦਾ ਜਿਹੜਾ ਪੈਦਾ ਕੀਤਾ ਉਹ ਬੜਾ ਉਹਨੇ ਪਹਿਲਾਂ ਹੀ ਇਹਨਾਂ ਰੈਸ਼ਨ ਉਹਨੇ ਜਿ ਰੱਖਿਆ ਹੈ ਵੀ ਐਡਾ ਜਰ ਪੂਜਾ ਨਹੀਂ ਹੋਣਾ ਨਹੀਂ ਇਹਨੂੰ ਇਹਨਾਂ ਜਰ ਜਿਉਂਦਾ ਰੱਖਣਾ ਉਹਦਾ ਸ਼ਰੀਰ ਇਹੋ ਜਿਹਾ ਬੜਾ ਸ਼ਰੀਰ ਐਸਾ ਬੜਾ ਹੈ ਪਹਿਲਾਂ ਇਹਨੂੰ ਪਤਾ ਨਹੀਂ ਪਤਾ ਸੀ ਇਸ ਕਰਕੇ ਇਹ ਜਿਹੜੀ ਸਾਰੀ ਚੀਜ਼ ਦੀ ਸਟੱਡੀ ਹੈ ਉਧਰ ਦੀ ਸਟੱਡੀ ਹੈ ਕਾਦਰ ਦੇ ਗੁਰਦੇ ਇਹਦੇ ਜੋ ਰੂਪ ਪਛਾਣੇ ਉਹਦੀ ਸ਼ਕਤੀ ਨੂੰ ਪਛਾਣੇ ਉਹਦੇ ਗੁਣਾਂ ਨੂੰ ਪਛਾਣੇ ਭਾਈ ਬਟਕ ਬੀਜ ਮੈਂ ਰਵ ਰਹੇ ਹੋ ਜਾ ਕੋ ਤਿੰਨ ਲੋਕ ਵਿਸਾਰ ਬਟਕ ਬੀਜ ਮੇਰੇ ਰਵ ਰਹੇ ਦੇਖੋ ਜਿਹਦਾ ਤਿੰਨਾਂ ਲੋਕਾਂ ਦੇ ਵਿੱਚ ਵਿਸਾਰ ਹੈ ਸਾਰੇ ਜੀਵ ਨੇ ਉਹ ਕਿਵੇਂ ਸਾਰੇ ਜੀਵ ਕਿਵੇਂ ਕਹਿੰਦੇ ਕੋ ਬਰੋਟਾ ਹੁੰਦਾ ਉਹ ਬੀਜ ਨੇ ਬੀਜ ਨੇ ਸਾਰੇ ਜੋ ਰੋਟੇ ਸਾਰੇ ਵੀ ਜਦਿ ਰੋਟੇ ਤੇ ਇਸ ਕਰਕੇ ਬੀਜ ਰੂਪ ਹੈ ਸਾਰੇ ਹੁਕਮ ਹੈ ਕੇ ਬੀਜ ਬੀਜ ਵੀ ਸਾਰੇ ਜੋ ਹੋਏਗੇ ਹੁਕਮ ਇਹ ਜੋ ਹੁਕਮ ਪਰਗਟ ਹੋ ਸ਼ਬਦ ਸਾਰਿਆਂ ਜੋ ਕੋਈ ਪ੍ਰਗਟ ਹੋਣਗੇ ਜਾਂ ਜਮਲੇ ਜਿਵੇਂ ਸਾਰਿਆਂ ਜੋ ਕੋਈ ਰੋਟਾ ਫਾਇਦਾ ਹੁੰਦਾ ਇਹ ਬੀਜ ਰੂਪ ਹੈ ਨਾਮ ਦਾ ਨਾਮਾ ਬੀਜ ਨੂੰ ਕਹਿੰਦੇ ਨੇ ਤੇ ਨਾਮ ਹੈ ਨਾਮ ਅਹੀ ਹੁੰਦਾ ਨਾਮ ਦਾ ਬੀਜ ਕਿੰਨਾ ਲੱਗਿਆ ਨਾਮਾ ਕਹਤ ਲੋਚਨਾ ਨਾਮਾ ਨਾਮ ਦੇ ਬੀਜ ਨੂੰ ਕਿਹਾ ਹੈ ਨਾਮ ਦੇ ਹੋਟੀ ਜਾ ਨਾਮ ਦੇ ਹੋਟੀ ਜਾ ਨਾਮਾ ਹੋਟੀ ਜਾ ਜਦ ਇੱਕ ਹੋ ਗਿਆ ਫਿਰ ਨਾਮ ਨਾਮ ਨਬ ਜ਼ੋਰ ਸੈਂਸ ਵਿੱਚ ਵੀ ਆਇਆ ਹੈ ਇੱਕ ਹੋਰ ਜਗ੍ਹਾ ਵੀ ਆਇਆ ਹੈ ਉਹ ਨਾਮ ਬੇਂਵੀ ਸੈਂਸ ਵਿੱਚ ਵੀ ਆਇਆ ਹੈ ਬੀਜ ਹੈ ਜਿੰਨਾ ਜਿਹੜੇ ਦੋ ਬੀਜ ਹਨ ਉਹਨਾਂ ਜਿਹੜੇ ਨੂੰ ਪੋੜਨ ਜਾਂਦੇ ਹੈ ਨਾਮ ਉਹ ਕਹਿ ਰਹੇ ਤਾਂ ਬਟਕ ਉਹ ਤਾਂ ਅਗਿਆਦੀ ਕਹਿ ਰਿਹਾ جواب دین لو بس داں نہ میں جواب دیتا kada hath kay talojan meet o ta kada tu jehda sohi da dhaga sulda ne teri surt idhar chaldi hai kada so sadi jandi tainu lekha tainu jo pata nahi ki surt kivein lagayi di kithay lagayi ਕੀ ਬੀਜ ਰੋਟਾ ਹੋ ਸਕਦਾ ਹੈ ਜੇ ਬੀਜ ਰੋਟਾ ਵਿੱਚ ਹੋ ਸਕਦਾ ਹੈ ਸੱਚ ਹੈ ਤਾਂ ਸਾਡੇ ਹੈਗਾ ਤਾਂ ਬੀਜ ਵਿੱਚ ਉਹ ਵੀ ਹੈ ਵੱਡਕ ਬਰਾਢ ਰੂਪ ਹੈ ਵੱਡ ਕਹਿੰਦੇ ਨੇ ਵੱਡੇ ਰੂਪ ਨੂੰ ਬਰਾਢ ਰੂਪ ਨੂੰ ਬੀਜ ਹੁੰਦਾ ਬਾਬਰ ਰੂਪ ਇਹ ਬਾਬਰ ਰੂਪ ਹੈ ਬੀਜ ਛੋਟੇ ਤੋਂ ਛੋਟਾ ਰੂਪ ਬਾਬਰ ਰੂਪ ਬੀਜ ਹੈ ਉਹ ਬਾਵਲ ਉਹ ਡਿਊਰ ਦਾ અવਤਾਰ ਇਹ ਬਾਵਨ ਨੇ અવਤਾਰ ਹੁਣ ਮੀਨਿਮ ਸਾਈਜ਼ ਵੀਡੀਓ ਦਾ ਸਾਈਜ਼ ਵੀ ਵਿੱਚ ਮੀਨਿਮ ਸਾਈਜ਼ ਹੁੰਦਾ ਹੈ ਰੋਟੇ ਦਾ ਉਹਨਾਂ ਨੇ ਸਰੀਰ ਕਰਕੇ ਆਪਣੇ ਸਰੀਰ ਕਰਕੇ ਉਹ ਮਛਰ ਉਹ ਬੌਣੇ ਦਾ ਤਾਂ ਮਛਰ ਝੋੜਾ ਫਿਰ ਖਸਰ ਦੇ ਡਾਲੇ ਨੂੰ ਆਗੇ ਛੋਟਾ ਪਰ ਖਸਰ ਦਾ ਪੇੜ ਕਿਡਾ ਹੁੰਦਾ ਹੈ ਦਾ ਪੇੜ ਕਿਡਾ ਹੁੰਦਾ ਪੇੜ ਦਾ ਫਰਕ ਹੈ ਹੈ ਉਹ ਟਾਹ ਪੇੜ ਤਾਂ ਬਹੁਤ ਵੱਡਾ। ਤੇ ਬੇਦਰਾਂ ਬੀਜ ਵੀ ਉਤੋਂ ਛੋਟਾ ਹੁੰਦਾ। ਪੇੜ ਵੱਡਾ ਹੁੰਦਾ ਹੁੰਦਾ ਬਰਾਡ ਰੂਪ। ਵੱਡਾ ਰੂਪ। ਮੁੱਟੇ ਵੱਡਾ ਰੂਪ। ਪਰਕ ਬੀਜ ਜਿੰਮ ਦਾ ਬਰੇ ਰੋ। ਉਹ ਬਰਾਡ ਰੂਪ ਜਿਹੜਾ ਕਹਿੰਦੇ ਨੇ ਦੋ ਬਰਾਡ ਰੂਪ। ਬਰਾਡ ਰੂਪ ਸਰਵ ਵਿਆਪੀ ਰੂਪ ਨੂੰ ਕਹਿੰਦੇ। ਸ਼ਬਦ ਰੂਪ ਇਹਦਾ ਬਰਾਡ ਰੂਪ ਹੈ। ਜਦੋਂ ਵਿਸਪੋਰਡ ਹੈ ਨਾ ਗੋਰਾ ਗਿਆਨ ਚਲਿਆ ਬਰਾੜ ਰੂਪ ਹੋ ਗਿਆ ਕੋੜਾ ਗਿਆਨ ਚਲਾਇਆ ਗਿਆ ਨਾ ਜਿੰਨਾ ਜਰ ਬੀਜ ਰੂਪ ਹੈ ਇਹ ਉਹਨਾਂ ਚੜ ਗਿਆਨ ਨਹੀਂ ਨਰਾਸਦਾ ਬੀਜੋ ਸੂਝੇ ਕੋਈ ਕੋਈ ਬਹਾਦਰੀ ਚਾਹ ਪਾਏ ਪਾਵੇਂ ਸਤ ਸੰਤੋਖ ਦੀ ਅਵਸਥਾ ਦੀ ਹੈ ਪਰ ਇਹਨੂੰ ਤਰਲੋਗ ਦੀ ਸੋਝੀ ਨਹੀਂ ਸੋਝੀ ਸਰਪ ਕਿੰਨੀ ਹੈ ਸੋਝੀ ਸਰਪ ਐਨੀ ਹੈ ਵੀ ਮੇਰਾ ਇਹ ਚੀਜ਼ ਨੁਕਸਾਨ ਹੈ ਇਹ ਚ ਲਾਭ ਕੌਡੀਆਂ ਛੱਡ ਲਈ ਕੌਡੀ ਬਦਲੇ ਜਨਮ ਸੀ ਉਹ ਛੱਡ ਦਿੱਤਾ ਮਾਇਆ ਦਾ ਮੋਹ ਤੇ ਆ ਗਿਆ ਸਰ ਅੱਜ ਉਧਰ ਮਿਲਿਆ ਹੀ ਨਾਮ ਨਹੀਂ ਮਿਲਿਆ ਗਿਆਨ ਮਿਲਿਆ ਗਿਆਨ ਤਾਂ ਬਿਲ ਗਿਆ ਮਾਇਆ ਤਾਂ ਛਿੜਤੀ ਨਾਮ ਨਹੀਂ ਮਿਲਿਆ ਮਾਇਆ ਜੋ ਮਰਤਾ ਗਿਆ ਜਿਉਦਾ ਨਹੀਂ ਹੋਇਆ ਜਿਨ੍ਹਾਂ ਅਜੇ ਜਿਉਦਾ ਨਹੀਂ ਨਾ ਹੁੰਦਾ ਬੋਲਣਾ ਜਰ ਬੋਲਦਾ ਨਹੀਂ ਜਦੋਂ ਇਹ ਜੁਦਾ ਹੋਇਆ ਨਾਮ ਇਹਨੂੰ ਸੁਣਿਆ ਜਾਂ ਨਾਮ ਸੁਣੂਗਾ ਗ੍ਰਾਮ ਯਾਦ ਕਰੂਗਾ ਉਹ ਜਿਹੜਾ ਬੋਲੂਗਾ ਉਹ ਸੱਚ ਹੋਊਗਾ ਉਹ ਬਣੇ ਬੋਲਣ ਦਾ ਰੋ ਬਣਿਆ ਜੇ ਬੋਲੂਗਾ ਔਰ ਬੁਲਾਇਆ ਬੋਲੂਗਾ ਫਿਰ ਬੁਲਾਇਆ ਬੋਲੂਗਾ ਸੱਚ ਨਹੀਂ ਬੋਲਦਾ ਜੋ ਸੁਰੂਆ ਹੋ ਬਲੂ ਜਦ ਦੇਖਾਂ ਜੋ ਦੇਖੂਗਾ ਕੁਦਰਤ ਦੇ ਵਿੱਚ ਸਭ ਕੁਲ ਪਲਾਹ ਲਹੁ ਤਾਂ ਕਿਆ ਕਹੂ ਕਹੂ ਤੋ ਕੋ ਉਪਕਾਰ ਫਿਰ ਉਹਦੇ ਉਪਕਾਰ ਇਹ ਦਸੂਗਾ ਵਕਤ ਵੀ ਹੋਰ ਕੁਝ ਨਹੀਂ ਸਕਦਾ ਇਹਦੇ ਚ ਉਹਦਾ ਬੋਲ ਗਾਏ ਨੇ ਫਿਰ ਵੀ ਦਸੂਆ ਕਿ ਉਪਕਾਰ ਇਹ ਦਸੂ ਉਹ ਗੋੜੇ ਗਾਏਂ ਤਰੂ ਹੋਰ ਕੀ ਕਰੂਗਾ ਇਹ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦਾ